ਸ੍ਰੀ ਮਹਲਾ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਵਿਖਮ ਫਲ ਆਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੈ ਤਿਸ ਆਨ ਕ ਮਾਇਆ ਕਰਮ ਬਿਰਖ ਜੇ ਦਾ ਸਰੀਰ ਹੈ ਸਾਡੇ ਕੋ ਮਾਇਆ ਦਾ ਕਰਮ ਬਿਰਖ ਬਿਰਖ ਹੈ ਬਿਰਖ ਸਰੀਰ ਇੱਕ ਜੇ ਚਲਦਾ ਫਿਰਦਾ ਇਹ ਕਰਮ ਬਿਰਖ ਹੈ ਜੇ ਕੁਝ ਕਰਨਾ ਹੈ ਕੁਝ ਕਰਨ ਵਾਸਤੇ ਸਰੀਰ ਮਿਲੇਆ ਕਰਮ ਬਿਰਖ ਹੈ ਇਹ ਸੋਚ ਚਲਾਈ ਕਰਮ ਸਾਡੇ ਵਾਸਤੇ ਸੋਚ ਕਹੇਗੀ ਇਹ ਵੀ ਉਹ ਜਾਇ ਫਲ ਲੱਗਣ ਜੇ ਤਾਂ ਆਪਣੇ ਪਾਣੀ ਚੱਲੂਗਾ ਤਾਂ ਵਿਖਦੇ ਫਲ ਲੱਗਣਗੇ ਜੇ ਗੁਰ ਦੇ ਪਾਣੀ ਚੱਲੂਗਾ ਰਬਰ ਫਲ ਲੱਗਣਗੇ ਇਹ ਕਰਮ ਬਿਰਖਾ ਸੋਚ ਇਹਦੇ ਚ ਮਨ ਇਹ ਦਰ ਮਨ ਪਹੁੰਚਦਾ ਜਿਹੜਾ ਇਹ ਕਰਮ ਫਿਰਖੋ ਦੋ ਕਿਸਮ ਦੇ ਫਲ ਨੇ ਫਲ ਅਪ੍ਰਿਤ ਉਪ੍ਰਿਤ ਫਲ ਵੀ ਲੱਗ ਸਕਦਾ ਇਹਨੂੰ ਫਲ ਦੇ ਤੇ ਜ਼ਹਿਰ ਦਾ ਫਲ ਵੀ ਲੱਗ ਸਕਦਾ ਆਪਣੇ ਪਾਣੀ ਚੱਲੂ ਤਾਂ ਮਾਇਆ ਇਕੱਠੀ ਕਰੂ ਸਿਰਫ ਫਾਲੇ ਸਰੀਰ ਵਾਸਤੇ ਮਾਇਆ ਦਾ ਜਿਹੜਾ ਵਿਰਸ਼ਾ ਇਹਦੇ ਵਾਸਤੇ ਹੀ ਇਹਦਾ ਇਹਦੀ ਖਰਾਜ ਇਕੱਠੀ ਕਰੂ ਇਹਦੇ ਖਾਣ ਪੀਣ ਇਕੱਠਾ ਹੋਵੇ ਇਹ ਸਿਰੇ ਰਹਿ ਜਾਣੇ ਸ਼ਰੀਰ ਵੀ ਇਹਦਾ ਇਕੱਠਾ ਕੀਤਾ ਹੋਇਆ ਹੈ ਇਹ ਦਿਸਣ ਲੈ ਅੰਮ੍ਰਿਤ ਫਲ ਜਿਹੜਾ ਹੈਗਾ ਉਹ ਆਤਮਾ ਦੀ ਖੁਸ਼ਾਕ ਹੈ ਗੁਰਕੇ ਭਾਣੇ ਦੇ ਵਿੱਚ ਜਿਹੜਾ ਅੰਮ੍ਰਿਤ ਫਲ ਮਿਲੂਗਾ ਇਹਨੂੰ ਆਪਣੇ ਭਾਣੇ ਦੀ ਦੇਤਾ ਫਲ ਮਿਲੂਗਾ ਇਹ ਜੋ ਮਰਜ਼ੀ ਕਰੇ ਇਹ ਤਾਂ ਸਚਾਈ ਦੱਸ ਦਿੱਤੀ ਸਭ ਤੇ ਜੀਵ ਨਹੀਂ ਕਰਦਾ ਕੁਝ ਵੀ ਜੀਵ ਉਹਦਾ ਮਨ ਹੈ ਅਸਾਂ ਤੇ ਇੱਥੇ ਆ ਕੇ ਦੱਸਦਾ ਵੀ ਲੋਰੀਆਂ ਨੇ ਕੋਈ ਆਖਰੀ ਆ ਜਨਾ ਦੋਰੀ ਕੋਈ ਆ ਕਾਰਨ ਕਰਤਾ ਹੀ ਕਰਦਾ ਜੋ ਕੁਝ ਕਰਦਾ ਉਹ ਆ ਕੰਮ ਚਾਹੇ ਬੇਸਪੈਦਾ ਕਰ ਲਵੇ ਹੋ ਚਾਹੇ ਅਪਰਦਾ ਕਰ ਲਵੇ ਚਾਹੇ ਤਾਂ ਆਪਣੀ ਖੁਰਾਕ ਪੈਦਾ ਕਰ ਲਵੇ ਕਰਤੇ ਦੀ ਖੁਰਾਕ ਬਸ ਨਹੀਂ ਹੈ ਅਬਰਦਾ ਉਹ ਅਬਰਦਾ ਜਿਹੜਾ ਫਾਲਾ ਉਹ ਕਰਤੇ ਦੀ ਖੁਰਾਕ ਹੈ ਚਾਹੇ ਆਪਣੇ ਵਾਸਤੇ ਕਰ ਲਵੇ ਕੁਝ ਪੈਦਾ ਦੇ ਭੁੱਖਾ ਕਿਆ ਖਾਏ ਕਿਉਂ ਭੁੱਖਾ ਅੱਗੇ ਕਰਤੇ ਨਹੀਂ ਜਾਣਾ ਅੱਗੇ ਹੰਸ ਇਕੱਲਾ ਹੰਸ ਨੇ ਆਪਣੇ ਵਾਸਤੇ ਥੰਨ ਵਾਸਤੇ ਰਾਹ ਦਾ ਖਰਚ ਕੀ ਲੈਣਾ ਨਾਮ ਲੈ ਕੇ ਜਾਣਾ ਆਪਣੇ ਖਾਣ ਨੂੰ ਇਹ ਆ ਵੇਖਦਾ ਸੀ ਜੀ ਦੇ ਫੜਾ ਕੈਸੀ ਰਹਿ ਜਾਣੀ ਜੀ ਵਿੱਚ ਰਹਿ ਜਾਣ ਇਹ ਕਰਤਾ ਹੀ ਕਰਦਾ ਜੋ ਕੁਝ ਕਰਦਾ ਹੈ ਖਵਾਲੇ ਤੇ ਫਸ ਐਸਾ ਖਵਾ ਤੈਸਾ ਹੋ ਜਾਂਦਾ ਹੋ ਜਾਇ ਫਲ ਹੋ ਜਾਂਦਾ ਹੈ ਇਹ ਮਾਨਾ ਜੂ ਅਬਰ ਦੇ ਫਲ ਦੀ ਖਰਾਕ ਮੈਂ ਤਾਂ ਅਬਰ ਦੇ ਅਬਰ ਹੋ ਜਾਂਦਾ ਹੈ ਜੇ ਜ਼ਹਿਰ ਦੀ ਖਰਾਕ ਖਾਉ ਫਿਰ ਮਾਇਆ ਮੋਜ ਫਸਿਆ ਰਹੇ ਜੇ ਸਰੀਰ ਦੀ ਖਰਾਕ ਖਾਉਂ ਕੈਸਾ ਹੀ ਹੋ ਜਾਂਦਾ ਹੈ ਜੈਸਾ ਠੀਕ ਹੈ ਜੀ ਜਿਸ ਤਰ੍ਹਾਂ ਦਾ ਗਿਆਨ ਇਹਨੂੰ ਦਵਾਂਗੇ ਉਸ ਤਰ੍ਹਾਂ ਦਾ ਹੀ ਇਹਨੂੰ ਫਲ ਲੱਗੂ ਹੈ ਜੀ ਹਾਂ ਉਸ ਤਰ੍ਹਾਂ ਦਾ ਫਲ ਹੋ ਜਾਂਦਾ ਜੈ ਜਿਹੜੀ ਇਹਦੀ ਸੋਚ ਹੈ ਉਹ ਫਲ ਹੋ ਜਾਊਗੀ ਠੀਕ ਹੈ ਜੀ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ ਐਨੀ ਜਲੀ ਨਾਮ ਵਿਸਾਰਿਆ ਇਕ ਨਾ ਨਾਲ ਇਹ ਜਿਹੜਾ ਇਹ ਕਿਉਂ ਕਰਦਾ ਹੈ ਭਲਾ ਆ ਜਿਹੜੀ ਪਹਿਲੀ ਪਹਿਲਾ ਸ਼ਲੋਕ ਹੈ ਇਹਨੂੰ ਗੁਰੂ ਨਾਨਕ ਦਾ ਹੋਰੋਂ ਗਾਹ ਬਦੋਂ ਮੈਨੇ ਉਹ ਅੰਦਰ ਦੇਵ ਜੀ ਉਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਜਿਹੜੀ ਬਦਲ ਕੇ ਗੱਲ ਇਹ ਵਾਇਆ ਦੇ ਜਿਹੜੇ ਪਦਾਰਥ ਇਕੱਠੇ ਕਿਉਂ ਕਰਦੇ ਇਹ ਵਿੜਿਆਈ ਚਾਹੁੰਦਾ ਹੈ ਦੁਨੀਆਂ ਦੀ ਵੈਸੇ ਕੁਛ ਇਹਨੂੰ ਘਾਟਾ ਪੈ ਗਿਆ ਉਹ ਘਾਟੇ ਦਾ ਤਾਂ ਪਤਾ ਨਹੀਂ ਇਹ ਦੁਨੀਆਂ ਦੀ ਵਿੜਿਆਈ ਦੇ ਵਿੱਚ ਸ਼ਾਇਦ ਉਹ ਘਾਟਾ ਪੂਰਾ ਕਰ ਰਿਹਾ ਇਹਦਾ ਅਵਨਾਸ਼ੀ ਰਾਜ ਚੱਲਿਆ ਗਿਆ ਦੁਨਿਆਵੀ ਰਾਜ ਲੈ ਕੇ ਸ਼ਾਇਦ ਸੈਟੀਸਫਾਈ ਹੋਣਾ ਚਾਹੁੰਦਾ ਲੇਕਿਨ ਨਹੀਂ ਹੋ ਸਕਦਾ ਹੈ ਨਾਣਕ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਹਨਾਂ ਨੂੰ ਅੱਗੇ ਜਾਲਦੇ ਇਹਨਾਂ ਨੇ ਉਹ ਕੀਤਾ ਤੇਰਾ ਬਖਵਾਨ ਆਹ ਕੰਦੂ ਇਹ ਕਰਵਾਉਂਦੀਆਂ ਨੇ ਅੰਦਰੋਂ ਜੇ ਦੁਨੀਆ ਦੀ ਵਡਿਆਈ ਦੀ ਲੋੜ ਪੈ ਗਈ ਜੇ ਦੁਨੀਆ ਦੀ ਵਡਿਆਈ ਦੀ ਇੱਛਾ ਹੋ ਗਈ ਤਾਂ ਸਮਝੋ ਡੁੱਬ ਗਿਆ ਬੇਟਾ ਫਿਰ ਉਹਦਾ ਆਪਣੇ ਪੈਰ ਕੋਹੜਾ ਆਤਮ ਹੱਤਿਆ ਗੱਲ ਹੀ ਆਦਬ ਹੋ ਗਿਆ ਇਹ ਵੀ ਜਲ ਈ ਨਾਮ ਵਿਸਾਰਿਆ ਇਹਨਾਂ ਜਲੀਆਂ ਨੇ ਜਲਣੀਆਂ ਨੇ ਤਾਂ ਨਾਮ ਸੱਚ ਵਿਸਾਰਿਆ ਇੱਕ ਨਾਲ ਇੱਕ ਵੀ ਮੜਾਈ ਨਾਲ ਜਾਂਦੀ ਦੀ ਰਹਿ ਜਾਂਦੀਆਂ ਨੇ ਉੱਥੇ ਕੀ ਆ ਉੱਥੇ ਰਗੋਸ਼ੀ ਉੱਥੇ ਰੂਹ ਸਰੀਮਗਲ ਨਾ ਪੈਂਦਾ ਜਾ ਕੇ ਜਿੰਨਾ ਮਰਜੀ ਵੱਡਾ ਹੋ ਜਾਵੇ ਚਾਰ ਜੋਗਾਣੀ ਉਮਰ ਹੋ ਜਾਵੇ ਨਾਲ ਚੱਲੇ ਸਭ ਕੋਏ ਹੋ ਜਾਵੇ ਸਾਰੇ ਖੰਡਾਂ 'ਚ ਇਹਨੂੰ norr eh di gall mande hon par jithe sun da naam vi vaat vich puchhe koi othe koi nahi jannda enu sodi eh di vadhai ton othe koi nahi chahnda han inni jali naam vi sareya ik na challiyan naal duniya vi halda koi nahi janndi ethi reh jandiyan othe koi puchda vi nahi naal ki na jana othe ta giraftar kare aaye janda baagi ho janda jeda aadmi raj di sochda hai vadda honi sochda hai asal vich ਉਹ ਵੱਡੇ ਦਾ ਸ਼ਰੀਕ ਹੁੰਦਾ ਸ਼ਰੀਕ خدا ਬਣ ਜਾਂਦਾ ਉਹ ਤਾਂ ਬਾਗੀ ਆ ਫਿਰ ਬਾਗੀ ਫਿਰ ਇਥੇ ਗ੍ਰਿਫਤਾਰ ਕਰਕੇ ਇਹਨੂੰ ਪੇਸ਼ ਕੀਤਾ ਜਾਂਦਾ ਉੱਥੇ ਉਹ ਕਹਿੰਦੇ ਬਗਾਵਤ ਕੀਤੀ ਸੀ ਹੈ ਬਸਰ ਕਰ ਲੈਂਦਾ ਫਿਰ ਉੱਥੇ ਜਾ ਕੇ ਹਾਂਜੀ ਸਿਰ ਸਿਰ ਹੋਏ ਨਵੇੜ ਹੁਕਮ ਚਲਾਇਆ ਤੇਰੇ ਹੱਥ ਨਵੇੜ ਤੂੰ ਹੈ ਮਨ ਪਾਇਆ ਤੇਰੇ ਮਨ ਦੇ ਉੱਤੇ ਹੀ ਹੈ ਤੇਰੇ ਸਿਰ ਦੇ ਉੱਤੇ ਹੀ ਨਵੇੜ ਹੈ ਤੂੰ ਕੀ ਸੋਚ ਹੈ ਤੇਰੀ ਉਹ ਚਲਾਇਆ ਹੁਕਮ ਤੇਰਾ ਹੀ ਚੱਲਦਾ ਤੂੰ ਚਾਹੇ ਆਪਣਾ ਬੁੜਦੇ ਜਿਹੜਾ ਤੇਰਾ ਮਾਨਾ ਉਹਨੂੰ ਰਾਜੀ ਕਰਦਾ ਚਾਹੇ ਚਾਹੇ ਤਾ ਦੁਨੀਆਂ ਕੇ ਵਡਿਆਈਆਂ ਜਿਹਾ ਚਾਹੇ ਸੱਚੇ ਦੀ ਵਡਿਆਈ ਕਰਦਾ ਚਾਹੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਭਾਂਡਿ ਜਿ ਰਹਿ ਕੇ ਆਪ ਦਾਸ ਬਣ ਕੇ ਚੱਲ ਤੇਰੇ ਹੱਥ ਨਵੇੜ ਚਾਹੇ ਤੂੰ ਦੁਨੀਆਂ ਦੀਆਂ ਵਡਿਆਈਆਂ ਦੇ ਵਿੱਚ ਫਸਿਆ ਰਹਿ ਚਾਹੇ ਖਰਤੇ ਪੁਰਖ ਦੀ ਅਗਿਆਚ ਚੱਲ ਆਪਣੀ ਬੜਿਆਈ ਨੂੰ ਛੱਡ ਪਰੇ ਪਰਮਤ ਲੈ ਲੈ ਤੇ ਤੇਰੀ ਦਰਗਾਹ ਤੇ ਬੜਿਆਈ ਹੋਗੀ ਦਰਗਾਹ ਦੇ ਵਿੱਚ ਦੀ ਤੂੰ ਪਰਮਹਰ ਹੋ ਜੂਗਾ ਉੱਥੇ ਇੱਜ਼ਤ ਨਾਲ ਕਰਕੇ ਲੈ ਜਾਣਗੇ ਉੱਥੇ ਇੱਥੇ ਗੱਲ ਚ ਐ ਅੱਗੇ ਇੱਥੇ ਗੱਲ ਚ ਐ ਛੋਟਾ ਬਣ ਕੇ ਰਹਿਣ ਲੋ ਕਾਲ ਚਲਾਏ ਬੰਨ ਕੋਈ ਨਾ ਰਖਸੀ ਜਰ ਜਰਵਾਣਾ ਕੰਨ ਛੜਿਆ ਨੱਚ ਸੀ ਤਾਲ ਚਲਾਏ ਭੰਗਾਂ ਦੇ ਹੁਕਮੇ ਬੰਨ ਕੇ ਚਲਾਣਾ ਕਰ ਦੇਣਾ ਇੱਥੋਂ ਕੋ ਦਾ ਬੱਦਾ ਚੱਲ ਪਿਆ ਜਾਏਗਾ ਕਿਸੇ ਨਾਲ ਹੀ ਇੱਥੇ ਰੱਖਣਾ ਤੂੰ ਕੋਈ ਸ਼ਕਤੀ ਨਹੀਂ ਤੇਰੇ ਵਿੱਚ ਰੋਕ ਸਕਦੀ ਜਰਵਾਣਾ ਹੁਣ ਤੇਰੇ ਕੀ ਹੈ ਉਹ ਤੇਰੇ ਜਰਵਾਣਾ ਤੋਂ ਜੋਰ ਆ ਤੇਰੇ ਕੋ ਰੁਪਈਏ ਦਾ ਜਾਂ ਜੋਰ ਹੈ ਤੇਰੇ ਕੋ ਸ਼ਰੀਰ ਦਾ ਤੇ ਤੇਰੇ ਕਦਮਾਂ ਤੇ ਚੜਿਆ ਨੱਚਦਾ ਤੇ ਤੈਨੂੰ ਦੁਨੀਆਂ ਦੀਆਂ ਵਡਿਆਈਆਂ ਤੇਰੇ ਕਦਮਾਂ ਤੇ ਜਦੋਂ ਪੈਂਦੀਆਂ ਨੇ ਨਾ ਦੁਨੀਆਂ ਵਡਿਆਈ ਕਰਦੀ ਏ ਇਹ ਨੱਚ ਰਹੀ ਏ ਤੈਨੂੰ ਭੁੱਲ ਗਿਆ ਤੂੰ ਕੋਲੋਂ ਗਿਆ ਨੱਚਦਾ ਬਾਹਰ ਸਭ ਕੁਝ ਭੁੱਲ ਜਾਂਦਾ ਤੂੰ ਭੁੱਲਿਆ ਫਿਰਦਾ ਹੁਕਮ ਨੂੰ ਹੋਜੀ ਸਤਗੁਰ ਬੋਇਥ ਬੇੜ ਸੱਚਾ ਰੱਖ ਸੀ ਅਗਨਪਖੈ ਪੜਹਾੜ ਅੰਦਨ ਪਖ ਸੀ ਸਤਿਗੁਰ ਬਹੁਤ ਦਾ ਸਤਿਗੁਰ ਜਾਜਾ ਡੁੱਬਣ ਤੇ ਉਹ ਬਚਾਊਗਾ ਇਹ ਬੋਤ ਤੇ ਵਿਚ ਡੁੱਬ ਗਿਆ ਨਾ ਤੈਨੂੰ ਲਹਿਰਾਂ ਕੁਝ ਕਹਿਣ ਲੋਭ ਲਹਿਰ ਕੁਝ ਕਹਿ ਨਾ ਤੈਨੂੰ ਡੁੱਬੇ ਤੂੰ ਸਤਿਗੁਰ ਚ ਇਹ ਬੋਤ ਆ ਬੇੜਾ ਉਹ ਜਹਾਜ ਨੂੰ ਕਹਿੰਦੇ ਨੇ ਬੇੜਾ ਵੀ ਕਹਿੰਦੇ ਨੇ ਸੱਚਾ ਰਖੀ ਬੇੜਾ ਸੱਚਾ ਇਹੀ ਰਕੂਵਾ ਤੈਨੂੰ ਡੁੱਬਣ ਦੇ ਸਤਿਗੁਰ ਚੋਂ ਜਾਊਗਾ ਅਗਰ ਪਹਹਾ ਪਰ ਆਮਨ ਲਪਖੀ ਅਜੇ ਤਰੇ ਤਹਿਨਦੀ ਆਗਾ ਨਾ ਬਲਖਦੀ ਦਰਦ ਨਾਲ ਜਿਸਾਂ ਦੀ ਆਗਾ ਲੋੜਾਂ ਨੇ ਇੱਕ ਖਿਆਲ ਇੱਕ ਇੱਕ ajo ਮਸਲਾ ਇੱਕ ਇਛਾ ਪੂਰੀ ਨਹੀਂ ਹੋਈ ਵੀ ਹੋਰ ਪੈਦਾ ਹੋ ਜਾਂਦੀਆਂ ਨੇ ਆਸਨ ਬਖਸੀ ਇਹ ਬਖਦੀ ਹੋ ਰਹਿੰਦੀ ਹੈ ਤੇਰੇ ਅੰਦਰ ਤਿਸ਼ਨਾ ਹੋਰ ਇਹਦੀ ਕੋਈ ਵੀ ਕਿਸੇ ਕੰਨ ਮੱਠੀ ਪੈਦੀ ਹੋਈ ਹਾਂਜੀ ਠੀਕ ਹੈ ਜੀ ਪੜਹਾੜ ਦਾ ਪਾਪ ਕੀ ਹੈ ਜੀ ਪੜ੍ਹਖਦੀ ਐ ਅੱਛਾ ਜੀ ਅੱਜ ਪੜ੍ਹਖਦੀ ਐ ਨਾ ਠੀਕ ਐ ਫਾਥਾ ਚੁਗਾ ਚੋਗ ਮੁਕਮਈ छुटਸੀ ਕਰਤਾ ਕਰੇ ਸੁਹੋਗ ਪੂੜ ਨਿਕੁੱਟਸੀ ਫਸਿਆ ਆਇਆ ਤੂੰ ਫਾਥਾ ਚੁਗਾ ਚੋਗ ਉਹ ਚੋਗਾ ਚੁਗਦਾ ਜਿਹੜਾ ਆ ਫਸਿਆ ਆ ਚੁਗਦਾ ਜੇ ਤੂੰ ਇਹਨੂੰ ਸਮਝ ਆ ਜਾਏ ਨਾ ਇਹ ਫਸਿਆ ਹੋਇਆ ਇਹ ਚੋਗਾ ਪੁੱਲ ਜਿਵੇਂ ਤੜੀ ਉਹ ਆ ਜਦੋਂ ਪਿੰਜਰੇ ਚ ਬੰਦ ਹੋ ਜਾਂਦਾ ਰੈਲ ਦੀ ਥਾਂ ਦਾ ਬਾਹਰ ਬੜਦਾ ਪਿੰਜਰੇ ਚ ਦੇਖ ਕੇ ਬੜਦਾ ਜਿਉਂ ਮੈਂ ਬੰਦ ਹੋ ਜਾਂਦਾ ਜੇ ਕੜਕਾ ਜ ਉਹਨੂੰ ਪਤਾ ਲੱਗ ਜੇ ਫਿਰ ਭੁੱਲ ਜਾਂਦਾ ਖਾਣਾ ਸਭ ਕੁਝ ਹੁਕਮੇ ਛੁੱਟ ਸੀ ਫਿਰ ਤਾਂ ਉਹੀ ਛੱਡੂ ਜੀ ਨੇ ਵਧਾਇਆ ਉਹ ਜਿਹਨਾਂ ਤੈਨੂੰ ਪਾ ਜਿਹੜੇ ਹੁਕਮ ਨਾਲ ਪਿੰਜਰੇ ਚ ਆਇਆ ਉਹੀ ਹੁਕਮ ਨੂੰ ਭੜ ਲੈ ਤੇ ਛੁੱਟੇ ਹੁਕਮ ਹੀ ਛੁੱਟ ਸੀ ਹੁਕਮ ਨੇ ਨੇ ਪਾਇਆ શરીਰ ਚ ਹੁਕਮਾ ਦਰੂ ਘਰ ਕਦੋਂ ਤੇ ਸਤਿਆਂ ਦਾ ਮਾਇਆ ਚ ਹੁਕਮ ਨਾਲੇ ਮਾਇਆ ਦੇ ਵਿੱਚ ਹੁਕਮ ਨਾਲ ਆਇਆ ਜੇ ਹੁਕਮ ਨੇ ਲਾਲ ਲੱਗ ਗਿਆ ਤਾਂ ਮਾਰਾ ਜਿਸਤ ਜਾਨੀ ਗੱਡੀ ਰੋਕੀ ਕਰਤਾ ਕਰੇ ਸੋ ਕਰਤਾ ਜਿਹੜਾ ਕਰਤਾ ਉਹੀ ਹੋਣਾ ਕੋਈ ਨੀ ਖੁੱਟੀ ਜਿਹੜਾ ਝੂਠ ਹੈ ਜਿਹੜਾ ਕਹਿੰਦਾ ਮਾਇਦਰਦਨ ਕੁੱਦਪਾਪ ਐ ਕੂੜਾ ਇਹ ਕੋਟਾ ਸਾਹਿਬ ਲੋਕ ਨੇ ਤਾਂ ਸਰਕਾਰ ਕੇ ਨਹੀਂ ਕਰਦਾ ਕੋਈ ਉੱਥੇ ਕਾ ਕੇ ਪਤਾ ਲੱਗ ਨਹੀਂ ਸਕਦਾ ਕੋਈ ਨਹੀਂ ਕੁਛ ਕਰਦਾ ਭਗਵਾਨ ਹੋ ਰਿਹਾ ਸਭ ਕੁਝ ਇੱਕ ਲੱਗਦਾ ਤੈਨੂੰ ਕੁੱਦਪਾਪ ਇਹ ਨਹੀਂ ਹੈ ਕੁਛ ਵੀ ਕੁੱਦਪਾਪ ਸੱਚ ਇਹ ਹੈ ਚਤੁਰਤੀ ਵਾਲੀ ਐ ਉਹ ਰੋ ਆਇਆ ਹੋਇਆ ਵੀ ਕੁੱਦਪਾਪ ਹੈ ਜੀ ਐਥੇ ਦੁਨੀਆ ਬੰਦੀ ਜਾਂਦੀ ਐ ਕੂੜਾ ਜੋਤਦੇ ਸਾਰੇ ਕੂੜ ਪ੍ਰਚਾਰ ਐ ਕੂੜ ਦੀ ਬਤਾਲੀ ਗੁਰਬਾਣੀ ਸੱਚੀ ਬਾਣੀ ਹੈ ਸੱਚੀ ਮੱਤਾ ਹੈ ਸੱਚੀ ਬਾਣੀ ਹੈ ਇਹ ਦਰਗਾਹ ਜੋ ਆਈ ਹੋਈ ਹੈ ਇਹਨੂੰ ਕੂੜ ਕੌਣ ਸਰਦ ਕਰੂ ਇਹ ਜੋ ਕੁਝ ਹਰ ਦਰਗਾਹ ਕੀ ਉਹ ਆਖ ਸੁਣਾਉਂਦਾ ਉਹ ਤਾਂ ਦਰਗਾਹ ਦੀਆਂ ਗੱਲਾਂ ਹੀ ਦੱਸੀਆਂ ਹੋਈਆਂ ਦਰਗਾਹ ਦਾ ਫਰਮਾਨ ਹੀ ਹੈ ਹੁਕਮ ਹੀ ਦੱਸਿਆ ਉਹਨੇ ਹੁਕਮ ਕੀ ਹੈ ਮੈਂ ਕਹਿਆ ਸਭ ਹੁਕਮ ਆਉਂ ਜਿਓ ਉੱਤੇ ਜਾ ਕੇ ਗਣ ਪਤਾ ਲੱਗੂਗਾ ਕੋਈ ਨਹੀਂ ਪਤਾ ਹੁਕਮ ਦਾ ਉਸ ਦਾ ਗੁਰਮਤਾਰ ਹੁਕਮ ਤੇ ਵਿਸ਼ਵਾਸ ਹੈ ਗੁਰਬਾਣੀ ਹੁਕਮ ਆਇਆ ਇਹ ਵਿਸ਼ਵਾਸ ਕੌਣ ਕਰਦਾ ਜੇ ਦਾ ਕਰ ਲੂਗਾ ਤਰਜੂਗਾ ਜੇ ਨਹੀਂ ਕਰੂਗਾ ਤਾਂ ਬਿਆਹਤਾ ਹੋ ਜੀ ਠੀਕ ਹੈ ਜੀ ਇੱਥੇ 26ਵੀਂ ਪੌੜੀ ਸਮਾਪਤੀ ਹੈ ਜੀ